ਸ਼੍ਰੀ ਮਹਲਾ ਮਹੱਲਾ ਤੀਜਾ ਪੜ ਪੜ ਪੰਡਿਤ ਬਾਦ ਬਖਾਣ ਦੇ ਮਾਇਆ ਮੋਹ ਸਵਾਈ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਪੜ ਪੜ ਪੜੀ ਜਾਂਦੇ ਨੇ ਪੋਤੀਆਂ ਨੂੰ ਉਹ ਕਿਹਨਾਂ ਕਰਦੇ ਨੇ ਉਹ ਚ ਵਿਵਾਦ ਹੈ ਟਰੋਵਰਸੀ ਹੈ ਕੋਈ ਕੋਈ ਅਰਥ ਕਰਦਾ ਕੋਈ ਕੋਈ ਅਰਥ ਕਿਉਂਕਿ ਮਾਇਆ ਮੋਹ ਸੋਏ ਉਹਨਾਂ ਦਾ ਸੋ ਮਾਇਆ ਨਾ ਨੂਰ ਮਾਇਆ ਨਾਲ ਸੱਚ ਨਾਲ ਨਹੀਂ ਉਹਨਾਂ ਦਾ ਇਸ ਕਰਕੇ ਬਾਦਵਾਚ ਪਏ ਹੋਏ ਨੇ ਦੂਜੇ ਪਾਏ ਨਾਮ ਵਿਚਾਰਿਆ ਜਿਨ੍ਹਾਂ ਨੂੰ ਮਾਇਆ ਦਾ মোহ ਹੈ ਉਹ ਦੂਜੇ ਪਾਏ ਨਾਮ ਨਾਲ ਨਹੀਂ ਉਹਨਾਂ ਦਾ ਲਗਾਓ ਮਾਇਆ ਨਾਲ ਲਗਾਓ ਹੈ ਜਿਨ੍ਹਾਂ ਨੇ ਨਾਮ ਬਸਾਰਿਆ ਹੈ ਦੂਜੇ ਪਾਏ ਬਨਮੂਰਖ ਬਲੇ ਸਜਾਏ ਉਹਨਾਂ ਦੇ ਬਨ ਕਰਕੇ ਉਹ ਬੂਰਖ ਦੇ ਉਹ ਸਜਾਈ ਮਰ ਲੀਆ ਉਹਨਾਂ ਨੂੰ ਆ ਜੀਵਨ ਤਾਂ ਐਵੇਂ ਚਲਾ ਜਾਣਾ ਦੂਜਾ ਜੀਵ ਫਿਰ ਪਤਾ ਨਹੀਂ ਕਿਹਾ ਜਾ ਮਰ ਜਾਣ ਉਹਨਾਂ ਨੂੰ ਸਜਾ ਬਲਦੀ ਹੈ ਜਿਨ ਕੀਤੇ ਤੇ ਸੇਨਾ ਸੇਵਨੀ ਦੇਂਦਾ ਰਜਿਕ ਸਮਾਏ ਜਮਕਾ ਫਾਹਾ ਗਲੋਂ ਨਾ ਕੱਟੀਆਂ ਫਿਰ ਫਿਰ ਆਵੇਂ ਜਾਏ ਜਿਦ ਕੀਤਾ ਜਿਹੜਾ ਉਹਨਾਂ ਦਾ ਬੋਲ ਹੈ ਕਿਸੇ ਨਾ ਸੇਵਣੀ ਉਹਦੀ ਸੇਵਾ ਨਹੀਂ ਕਰਦੇ ਉਹਨੂੰ ਨੀ ਪੁੱਛਦੇ ਉਹਦਾ ਭੋਜਨ ਗਿਆਨ ਹੈ ਉਹਦਾ ਭੋਜਨ ਦੀ ਤੋ ਪ੍ਰਪ ਕਰਕੇ ਕਰਨਾ ਨਾ ਸੁਣ ਕੇ ਗੁਰਦੀਆਂ ਵਿਚਾਰ ਕੇ ਅਖਾਣੋਂ ਪੜ੍ਹ ਕੇ ਉਹ ਨਹੀਂ ਕਰ ਰਹੇ ਗੁਰ ਗੁਰ ਸ਼ਬਦ ਵਿਚਾਰ ਨਹੀਂ ਕਰਦੇ ਜੇਦਾ ਰਿਜਕ ਸਮਾਏ ਜਾਂ ਜਿਹੜਾ ਸਾਰਿਆਂ ਨੂੰ ਰਿਜਕ ਦਿੰਦਾ ਹੈ ਉਹਦੇ ਪਾਣੀ ਚ ਬਿਨ ਰਹਿਣ ਨੂੰ ਤਿਆਰ ਹੈਗੇ ਉਹਦੇ ਪਾਣੀ ਚ ਚੱਲਣ ਦੀ ਸੇਵਾ ਕਰ ਲਈ ਜੰਮਦਾ ਪਾਣ ਨਾਲੋਂ ਕੱਟਿਆ ਜੰਮਦਾ ਤੜ ਜਬੜ ਦਾ ਫਾਜ ਖੜੋ ਕਦੇ ਕਟਿਆ ਜਾਉ ਉਦੋਂ ਦੇ ਕਟਿਆ ਜਾ ਸਕਦਾ ਉਹਨਾਂ ਦੇ ਗਲੋਂ ਨਹੀਂ ਕਟਿਆ ਜਾਣਾ ਜਬੜ ਬਲ ਦਾ ਫਾਹਾ ਜਿਸਕੋ ਪੂਰਵ ਲਿਖਿਆ ਜਿਨ੍ਹਾਂ ਨੇ ਪਹਿਲਾਂ ਲਿਖਿਆ ਆ ਸੀ ਪੱਕਾ ਵੀ ਅਸੀਂ ਐਲ ਕਿ ਕੁਛ ਵੀ ਹੋਵੇ ਬਾਜੀ ਕੇ ਹੀ ਆਉਣੀ ਹੈ ਹਾਰ ਕੇ ਆਉਣੀ ਦੀ ਉਹਨਾਂ ਦਾ ਮਨ ਅਸਲ ਦੇ ਲਿਖਿਆ ਸਤ ਗੁਰ ਮਿਲਿਆ ਤੈਨ ਆਏ ਉਹਨਾਂ ਨੂੰ ਹੁਣ ਆ ਦੇ ਰਾਜ ਨੂੰ ਹੁਣ ਉੱਕੜ ਹੈ ਉਹਨਾਂ ਨੂੰ ਅੰਤਲਾ ਸਤ ਬਿਲ ਗਿਆ ਉਹਨਾਂ ਦੇ ਅੰਦਰ ਹੁਣ ਇੱਕ ਹੋ ਗਏ ਆਪਣੇ ਸਤੂਰ ਲੋਕ। ਉਹਨਾਂ ਦੇ ਉਹ ਇੱਕ ਹੋ ਗਏ ਅਨੰਦ ਨਾਮ ਤੇ ਆਏ ਨੇ ਦੇ ਹੁਣ ਸੁੰਦਰ ਦੇ ਵਿੱਚ ਅਗਲਾ ਨਾਨਕ ਸੱਚ ਸਮਾਏ। ਨਾਮ ਦੇ ਕਹਦਾ ਉਹ ਸੱਚ ਵਿੱਚ ਸਮਾ ਜਾ ਜਾਂਦੇ। ਕੋਈ ਸੱਚ ਵਿੱਚ ਸਮਾਏ ਨੇ ਜਾ ਕੇ। ਠੀਕ ਹੈ ਇਹ ਨਾਮ ਪਦਾਰਥ ਹੈ ਜੀ ਅੰਦੇ ਨਾਮ ਧਿਆਏ ਦੇ ਵਲ। ਆ ਨਾ ਆ ਗੋ ਦੋ ਤੇ ਨਹੀਂ ਲੋ ਨੋ ਬਰਾਦੇ ਸੱਚ ਸਮਾਏ ਦੇ ਆ ਸੱਚੂ ਆਸਾ ਚਾਹੇ ਵੀ ਸੱਚ ਨੂੰ ਕੋਸੀ ਵੀ ਸੱਚ ਉੱਤੇ ਕੇ ਠੀਕ ਹੈ ਗਿਆਨ ਸਤਿਗੁਰੂ ਮਿਲ ਗਿਆ ਸਤਿਗੁਰ ਨਾਮ ਤੇ ਆ ਕੇ ਸੱਚ ਚ ਮਿਲ ਗਿਆ ਮਹੱਲਾ ਤੀਜਾ ਸੱਚ ਵਣੰਜੈ ਸੱਚ ਸੀਮ ਦੇ ਜੇ ਗੁਰਮੁਖੀ ਪੈਰੀ ਪਾਹੇ नानक गुर कै पाणे जी चलनै सहजै सच समाहि सच बणदे सच शिव दे सच दी ओही करदे वे बणजे ओही करदे सच ਲੈणगे देणगे जे सच शिव दे जेडे सच दी शब्द विचार करदे दे ओही सच सच दी गुरबानी दी ने ਉਹ ਜਿਹੜਾ ਹੈਗਾ ਨਾਮ ਦਾ ਵਪਾਰ ਕਰ ਸਕਦੇ ਨੇ ਕੋਈ ਸਮਝ ਆ ਗਿਆ ਦੂਜੇ ਨੂੰ ਸਮਝਾਉਣ ਕਿ ਦੂਜੇ ਕੋਲ ਜਾਦਾ ਸਮਝ ਹੈ ਆਪ ਲੈ ਲਾਂਗੇ ਤੇ ਵਪਾਰ ਹੋ ਗਿਆ ਨਾਨਕ ਗੁਰ ਕੈ ਪਾਣੇ ਜੇ ਚੱਲਣ ਸਹਜੇ ਸਤਿਮਾਇ ਕਹਿੰਦੇ ਜੇ ਸੁਣ ਲਿਆ ਜੋ ਗੁਰਬਾਣੀ ਗੁਰ ਕਾ ਪਾਣਾ ਹੀ ਦੱਸਦੀ ਹੈ ਕਿ ਗੁਰਕੇ ਪਾਣੀ ਚੱਲਣ ਦੇ ਅੰਤਰਾਤਮ ਦੀ ਆਵਾਜ਼ ਨਾਲ ਚੱਲਣ ਕਹਿੰਦਾ ਹੈ ਸਹਜੇ ਸਤਿਮਾਇ ਬਾਜ਼ ਮਾਨਜਗਤ ਦਾ ਸੱਚੀ ਸੁਭਾਏ ਬੰਦਾ ਟਿਕਣਾ ਨਹੀਂ ਸੱਚ ਵਿੱਚ ਸੁਭੋੜ ਹੈ। ਚਾਹੇ ਜਵਸਤਾ ਚ ਜਾਗਰਤ ਅਵਸਥਾ ਚ ਹੋ ਜਾਂਦੇ ਨੇ ਸੁਪਨਾ ਖਤਮ ਹੋ ਜਾਂਦਾ ਹੈ ਜਾਗਦੇ ਦਾ ਸੁਪਨਾ ਹੁੰਦਾ ਹੀ ਜਾਗਦੇ ਨੂੰ ਸੁਪਨਾ ਹੁੰਦਾ ਨਾ ਜਾਗਦਾ ਸੁਪਨਾ ਦੇਖਦਾ। ਠੀਕ ਆਸਾ ਵਿੱਚ ਅਤ ਦੁੱਖ ਘਣਾ ਨੰਨ ਮੁਖੀ ਚਿਤ ਲਾਇਆ ਗੁਰਮੁਖੀ ਭਾਏ ਨਿਰਾਸ਼ ਪਰਮ ਸੁਖ ਪਾਇਆ। ਜਿਹੜੀ ਆਸਾ ਸंसारी ਆਸਾ ਹੈ ਵਿੱਚ ਅਤ ਦੁੱਖੜ ਅਤਿਆੰਤ ਦੁੱਖ ਹੈ ਰ ਬਹੁਤ ਜ਼ਿਆਦਾ ਆਸਾ ਪਦਾਰਥਾਂ ਦੀ ਇੱਛਾ ਸੰਸਾਰੀ ਵੜਿਆਈ ਦੀ ਇੱਛਾ ਜਿਹੜੀ ਹੈ ਇਹ ਅਤਿਆੰਤ ਦੁੱਖ ਦਾਇਕ ਹੈ ਇਹਦੇ ਦੁੱਖੇ ਦੁੱਖਲੇ ਸੁਭਲੀ ਹੈ ਚਿਤ ਕਣਾ ਬਲ ਬੁੱਖੀ ਲਾਇਆ ਪਰ ਬਲ ਨਾਲ ਇਹਦੇ ਨਾਲ ਚਿਤ ਰੰਗਾ ਹੋ ਗੁਰ ਬੁੱਖਾ ਚਿਤ ਵੀ ਲਗਿਆ ਮਨ ਨੇ ਤਾਂ ਮਨ ਚਿਤ ਵੀ ਇਹਨਾਂ ਦੇ ਵਿੱਚ ਲਗਿਆ ਆਇਆ ਇਧਰੇ ਗੁਰਮੁਖ ਪਾਇ ਨਰਾਸ ਪਰਮ ਸੁਖ ਪਾਇ ਗੁਰਮੁਖਾਂ ਨੇ ਆ ਜਿਹੜੀ ਸੰਸਾਰੀ ਚਾਹਵਾਂ ਨੇ ਤੋਂ ਨਰਾਸ ਹੋ ਗਏ ਉਹਨਾਂ ਦੇ ਅੰਦਰ ਕੀ ਹੈ ਅੱਛਾ ਇੱਕ ਆਸ ਰੱਖੀ ਹੋਈ ਹੈ ਮੁਰਬਾਹੇ ਉਹ ਜਾਣਾ ਨਾ ਹੋਵੇ ਇਹ ਆਸ ਆਉਣਾ ਜਾਣਾ ਕਟਿਆ ਜਾਵੇ ਇਹ ਆਸ ਹੈ ਪਾਇਆ ਕਿ ਕੋਈ ਅਛਾ ਨਹੀਂ ਹੈ ਗੁਰਮੁਖ ਪਾਇ ਦੇਰ ਆਸ ਪਰਪਰਸੋਕ ਪਾਇਆ ਇਹ ਜ਼ਰ ਕਰਕੇ ਤਾਂ ਉਹਨੂੰ ਪਰਪਰਸੋਕ ਮਿਲ ਜਾਂਦਾ ਮਨਰਾਸ ਹੋਣਾ ਮਾਇਆ ਦੀਆਂ ਚੰਨ ਤਿਆਗਣਾ ਪਰਪਰਸੋਕ ਹੈ ਮਾਇਆ ਦੀਆਂ ਇੱਛਾਂ ਵਿਦਾਈ ਜਾਣੀਆਂ ਯਾਰ ਬਹੁਤ ਸਾਰੀਆਂ ਇੱਛਾਂ ਰੱਖੀਆਂ ਜਾਣੀਆਂ ਬੜੀ ਤਾਪੇ ਜਾਂਦੀਆਂ ਨੇ ਇਹ ਕਿਹ ਧਿਆਨ ਦਾ ਦੁੱਖ ਹੈ ਦੁਖੀ ਰਹਿਣਾ ਸੁਖੀ ਰਹਿਣਾ ਸਿੱਖ ਦੀ ਵਰਦੀ ਆ ਦੱਸਦਾ ਗੁਰਬਾਣੀ ਦੇ ਤੱਕ ਨਿਰਾਸ਼ ਔਰ ਉਦਾਸ ਚ ਕੋਈ ਫਰਕ ਹੈ ਕਿ ਨਿਰਾਸ਼ ਔਰ ਉਦਾਸ ਇੱਕ ਚੀਜ਼ ਹੈ ਉਦਾਸ ਧੋਬਦੀ ਆ ਸਕਦੇ ਮਿਲਿਛੇ ਉਦਾਸ ਹਾਂ ਉਦਾਸ ਨਾ ਬਰਾਬਰ ਨੇ ਆਸਾਂ ਮਾਣੇ ਨਿਰਾਸ਼ੋ ਉਦਾਸ ਹੈ ਪਰ ਇੱਕ ਘਰਬਾਰ ਛੱਡ ਦੇਣ ਨੂੰ ਉਦਾਸੀ ਕਹਿੰਦੇ ਨੇ ਉਹ ਗੁਰਮਤ ਉਦਾਸ ਨਹੀਂ ਮੰਨਦੀ ਠੀਕ ਹੈ ਵਿਚ ਹੈ ਉਦਾਸ ਅਲਿਪਤ ਲਿਵ ਲਾਇਆ ਉਹਨਾਂ ਸੋਗ ਵਿਜੋਗ ਨਾ ਵਿਆਪਾਈ ਹਰ ਪਾਣਾ ਪਾਇਆ ਦੇਖੋ ਉਹ ਆ ਗਿਆ ਉਦਾਸੇ ਆ ਗਿਆ ਤੁਹਾਡੇ ਸਾਹਮਣੇ ਸਰਦ ਦੇ ਵਿੱਚ ਗ੍ਰਸਤ ਚ ਰਹਿੰਦੇ ਹੋਏ ਉਦਾਸ ਨੇ ਉਹ। ਅਲਿਪਤ ਨੇ ਲੇਵ ਲਾਇਆ, ਮਾਇਆ ਤੋਂ ਅਲਿਪਤ ਨੇ। ਚਿਰ ਕੁੜੀ ਛੱਡੀ ਹੋਈ ਐ, ਛੁੱਟ ਜਾਂਦੀ ਐ ਮਾਇਆ ਤੋਂ। ਲੇਵ ਲਾਇਆ ਅੰਦਰ ਲੇਵ ਲੱਗੀ ਹੋਈ ਜਾਂਦੀ, ਇੱਕੋ ਇਹ ਜਿਤਮੰਦ। ਪਾਣੇ ਨਾਲ ਇੱਕ ਬਿਕਦੇ। ਉਹਨਾਂ ਨੂੰ ਉਹਦਾ ਅਸਲੇ ਜਾਂਦਾ ਸੋਖ ਦਾ ਨਿਯੋਗ ਦਾ। ਉਹਨਾਂ ਦਾ ਸੋਖ ਵਿਯੋਗ ਦਾ ਅਸਲੀ ਹੁੰਦਾ, ਹਰ ਪਾਣਾ ਪਾਇਆ ਕਿਉਂਕਿ ਪਾਣਾ ਹੈ ਉਹ। ਆ ਉਹਨਾਂ ਨੂੰ ਪਾਣਾ ਮਿਠਾ ਲੱਗਦਾ ਇਸ ਕਰਕੇ ਜਿਹੜੇ ਸੋਗ ਉਹ ਦੁਨਿਆਵੀ ਸੋਗ ਨੇ ਅਲ ਵਿయోగ ਹੋ ਜਾਂਦੇ ਨੇ ਜਗਨ ਬਾਦ ਤੇ ਉਹਨਾਂ ਨੂੰ ਇਹਦੇ ਨਾਲ ਬਹੁਤ ਦੁੱਖ ਨਹੀਂ ਹੁੰਦਾ ਘਪਾਣਾ ਜਮੰਦ ਨੇ ਪਾਣਾ ਬੰਦਣ ਵਾਲੇ ਨੂੰ ਸੋਗ ਵਿయోగ ਅਸਲ ਦੀ ਕਰਦਾ ਹੁੰਦਾ ਠੀਕ ਹੈ ਜੀ ਨਾਨਕ ਹਰ ਛੇਤੀ ਸਦਾ ਰਵ ਰਹੇ ਤੁਰ ਲੈ ਮਿਲਾਇਆ ਨਾਲ ਹਰ ਨਾਲ ਸਦਾ ਮਿਲੇ ਰਹਿੰਦੇ ਨੇ ਆਪਣੇ ਮੂਹ ਨਾਲ ਸਦਾ ਮਿਲੇ ਰਹਿੰਦੇ ਨੇ ਤੁਰ ਲੈ ਮਿਲਾਇਆ ਸ਼ਬਦ ਵਿੱਚ ਜੁੜੀਨ ਹੋ ਜਾਂਦਾ ਨਹੀਂ ਤਾਂ ਇਸੇ ਤਰ੍ਹਾਂ ਅੱਗੇ ਜਾ ਕੇ ਤੁਰ ਤੁਰਤ ਕਰੇ ਜਾਂਦੇ ਨੇ ਸ਼ਬਦ ਵਿੱਚ ਲੀਡ ਹੋ ਜਾਂਦੇ ਦੀ ਜਾ ਕੇ ਜਿਵੇਂ ਸਦਾ ਹਾਲਾ ਵਿੱਚ ਹੁਕਮ ਦੇ ਵਿੱਚ ਲੀਡ ਹੋ ਜਾਂਦੇ ਦੀ ਜਾ ਕੇ ਠੀਕ ਹੈ ਜੀ ਇੱਥੇ 31ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ